ਸ਼ਲੋਕ ਮਹਲਾ 5ਵਾਂ ਸਤਗੁਰੂ ਪੂਰੇ ਸੇਵੀਐ ਦੁੱਖਾਂ ਕਾ ਹੋਏ ਨਾਸ਼ ਨਾਮ ਅਰਾਧਿਐ ਕਾਰਜ ਆਵੇ ਰਾਗ ਸਤਗੁਰੂ ਪੂਰੇ ਸੇਜੇ ਪੂਰੇ ਸਤਗੁਰੂ ਦੇ ਪਿੱਛੇ ਚੱਲਿਐ ਇਹ ਜਿਵੇਂ ਲੋਕ ਉਹਦੀ ਸੇਵਾ ਕਰੀਐ ਦੁੱਖਾਂ ਕਾ ਹੋਵੇ ਨਾ ਦੁਖਾ ਦਾ ਨਾਖ ਆਪੇ ਹੁਲੇ ਉੜ ਜਾਤ ਕਲਾਮ ਅਰਾਧਿਐ ਕਾਰਜ ਵੀ ਰਾਸ ਤੇ ਉਹਦੇ ਬਾਅਦ ਨਾਮ ਦੀ ਰੰਗ ਰੰਗ ਕਰੀਏ ਕਾਰਜ ਰਾਸ ਹੋ ਗਿਆ ਇੱਥੇ ਆਰਾਧਨ ਵਾਸਤੇ ਗਿਆਨ ਦਾ ਨਾਮ ਦੇ ਵਿੱਚ ਰਹਿੰਦਾ ਰਾਸ ਨਹੀਂ ਕਹਿੰਦੇ ਉਹਨੂੰ ਅੱਛਾ ਬਾਇਆ ਤੇ ਆਮ ਜਨ ਦੀ ਫੇਰਾਦ ਨੂੰ ਹੋ ਜਾਂਦੀ ਠੀਕ ਹੈ ਇਹ ਕਾਰਜ ਕਿਹੜਾ ਇਹਦੀ ਗੱਲ ਹੋ ਰਹੀ ਹੈ ਕਿਉਂਕਿ ਅਸੀਂ ਹਰੇਕ ਕੰਮ ਨੂੰ ਇਹ ਕਾਰਜ ਦੱਸਦੇ ਹਾਂ ਇਹ ਕਾਰਜ ਕਿਹੜਾ ਜੀ ਕਾਰਜ ਆਵੇ ਰਾਸ ਕਾਰਜ ਇੱਕੋ ਹੀ ਹੈ ਇਹ ਆਇਆ ਪਰਦੇਸ ਤੇ ਸੁਭਾਅ ਬਦਲ ਗਿਆ ਆਪਣਾ ਸੁਭਾਅ ਅੱਜ ਸੋਤ ਸਵਾਦ ਦੇ ਵਿੱਚ ਕਿਵੇਂ ਰਹੀਦਾ ਕਿਵੇਂ ਬੋਲੀਦਾ ਕਿਵੇਂ ਵਰਤਾਅ ਕਰੀਦਾ ਸੱਚ ਕਰਨ ਦੇ ਵਿੱਚ ਕਿਵੇਂ ਰਹੀਦਾ ਅੱਜ ਤਾਂ ਲੜਪੜ ਨਾਲੇ ਦੇ ਬੇਲ ਮਲਾਪ ਕਿਵੇਂ ਕਰੋਂ ਕਿਵੇਂ ਰਹਿਣ ਸਭ ਰਹਿਣ ਇਹ ਸਿੱਖਣਾ ਜਦੋਂ ਕੋਰਸ ਪੂਰਾ ਹੋ ਗਿਆ ਘਰ ਜਲੇ ਆਏ ਕੀਤਾ ਜਾ ਰਿਹਾ ਠੀਕ ਮਹੱਲਾ ਪੰਜਵਾਂ जिस ਸਿਮਰਤ ਸੰਕਟ छुटे ਆਨੰਦ ਮੰਗਲ ਬਿਸਰਾਮ ਨਾਨਕ ਜਪੀਏ सदा हर ਨਿਮਖ ਨਾ नाम। ਨਾਮ ਜਿਹੜੇ ਸਿਮਰਨ ਨਾਲ ਸੰਕਟ ਛੁਟ ਕੇ ਬੇ ਸੁਕੜ ਤੋਂ ਛੁਟਕਾਰਾ ਹੋ ਜਵੇ ਅਨੰਦ ਮੰਗਲ ਬਿਸਰਾਮ ਨਾਨਕ ਜਪੀਏ ਸਦਾ ਹਰਿ ਜਿਵ ਨਾਨਕ ਕਹਿੰਦਾ ਐਸੇ ਉਪਦੇਸ਼ ਨੂੰ ਵੇਖ ਜਪਣਾ ਚਾਹੀਦਾ ਐਸਾ ਜਿਹੜਾ ਉਪਦੇਸ਼ ਹੈ ਤੇ ਰਲੋ ਚਾਹੀਦਾ ਨਾਨਕ ਜਪੀਏ ਸਦਾ ਹਰਿ ਦਾ ਭਾਵ ਕੀ ਹੈ ਜੀ ਉਹ ਉਪਦੇਸ਼ ਹਰ ਰੂਪ ਹੈ ਅੱਛਾ ਹਰਾ ਫਿਰਦਾ ਹਰਾ ਕਰਦਾ ਹੈ ਸਭ ਨਾਲ ਜੋੜਦਾ ਜੇ ਪੱਤਾ ਹਰੇ ਦਾ ਦਰਖਤ ਨੂੰ ਜੁੜਿਆ ਹੋਇਆ ਹੈ ਪਰ ਜਦ ਬਦਲਦਾ ਗਿਆ ਨਾ ਬਦਰਾ ਪਜਿਆ ਹੋਣ ਲੱਗ ਗਿਆ ਦਰਖਤ ਛੱਡ ਦੂਗਾ ਪੱਤੇ ਸਾਰੇ ਦਰਖਤ ਨਾਲ ਜੋੜਦਾ ਹੈ ਹਰਾਪਣ ਮਤਲਬ ਮੂਲ ਹੋ ਗਿਆ ਮੂਲ ਹੋ ਗਿਆ ਠੀਕ ਹੈ ਜਿਰ ਚੱਕਈ ਹੈ ਬਰਚਟਾਈ ਕਈ ਰੁੱਤਦਾਲ ਸਹਾਖਾਈ ਹੈ ਬਾਕੀ ਸਭ ਨਾਲ ਪੂਰੀ ਜੋਤ ਨਾਲ ਜੋੜਦਾ ਹੈ ਹਰਾਪਣ ਇਹਦਾ ਅੱਛਾ ਜੀ ਜੇ ਅਗਰ ਆ ਓ ਹਰਾ ਹਰਾਪਣ ਖਤਪ ਕਰਦੀ ਉਹ ਤੋੜਦੀ ਹੈ ਠੀਕ ਹੈ ਜੀ ਹਾਂ ਅਗ ਦੇ ਵਿੱਚ ਰੁੱਸਿਆ ਜਾਂਦਾ ਜੀ ਇਹ ਹਾਂ ਜਦ ਵੀ ਇਹ ਜਪੋ ਜਿਹੜਾ ਅਵਸਥਾ ਪੈਦਾ ਕਰਦਾ ਹੈ ਜਿਹਦੇ ਨਾਲ ਇਹ ਅਵਸਥਾ ਦੀ ਹੈ ਪ੍ਰਾਪਤੀ ਹੁੰਦੀ ਹੈ ਇਹਦੋਂ ਹੋਰ ਕੀ ਚਾਹੀਦਾ ਔੜੀ ਤਿੰਨ ਸੋਭਾ ਕਿਆ ਗਣੀ ਜਿਨ ਹਰ ਹਰ ਲੱਧਾ ਦਾਦਾ ਸਰਣੀ ਸੋ ਛੁੱਟੈ ਬੱਧਾ ਕਿਡ ਕੀ ਸੋਭਾ ਕਿਆ ਗੜੀ ਉਹਨਾਂ ਦੀ ਦੀ ਕੀ ਕਰਦੀ ਹੈ ਉਹਨਾਂ ਵਰਗਾ ਦੂਆ ਕੌਣ ਕੋ ਸਕਦਾ ਗੜੀ ਦਾ ਮਤਲਬ ਉਹਨਾਂ ਵਰਗਾ ਦੂਜਾ ਕੋਈ ਹੋਰ ਹੋ ਸਕਦਾ ਜਿੱਦੀ ਹਰ ਹਰ ਲੱਧਾ ਜਿਹਨੂੰ ਹਰ ਗਿਆ ਉਹ ਤਾਂ ਸਾਰੇ ਕੋਈ ਜਾਈਦੇ ਫਿਰ ਦੂਆ ਨਹੀਂ ਐਰੋਜੀ ਕੋਈ ਕੋਈ ਅਵਸਥਾ ਆਉਂਦੀ ਸਾਰੇ ਉਹਨਾਂ ਦੀ ਗਿਣਤੀ ਵੀ ਕਰੀ ਦੀਰ ਦੀ ਸੱਚਖੰਡ ਵਾਲਿਆਂ ਦੀ ਗਿਣਤੀ ਨਹੀਂ ਟਾਈਂ ਕਰਦੇ ਕੋਈ ਗਿਣਤੀ ਕਰੀਏ ਕਿਦਰ ਕੋ ਦੀ ਹੋਂਦ ਅਸਲ ਵਿੱਚ ਸਾਧਨ ਲਫਜ਼ ਦੀ ਗੱਲ ਹੈ ਅੱਛਾ ਜੀ ਸਾਧਾ ਲਫਜ਼ ਸਧਿਆ ਹੋਇਆ ਅੱਛਾ ਜੀ ਬਣ ਹੋਇਆ ਬੰਦ ਜੇ ਛੱਡੀ ਪੈ ਜਾਵੇ ਠੀਕ ਹੈ ਜੀ ਸਾਧਾ ਨਹੀਂ ਪੜਨਾ ਸਾਧਾ ਸਧਿਆ ਹੋਇਆ ਸਾਧਾ ਸ਼ਰਣੀ ਜੇ ਸਾਧ ਕਰ ਲਿਆ ਉਹ ਤਾਂ ਉਹ ਤਾਂ ਲੈ ਜਾਣਗੇ ਲੁੱਟ ਕੇ ਸਭ ਕੁਝ ਠੀਕ ਹੈ ਜੀ ਸਾਦਾ ਹੈ ਪਵੈ ਇੱਕ ਉਹ ਛੁੱਟੇ ਆਪਣਾ ਛਟਕਾਰਾ ਲੈ ਜਾਂਦਾ ਦੋ ਸਾਧ ਇੱਕ ਇੱਕ ਦੇ ਦੀ ਵੇਲ ਤੁਹਾਨੂੰ ਕਿਤੇ ਵੀ ਦੁਨੀਆਂ 'ਚ ਅੱਜ ਤੱਕ ਦੋ ਸਾਧ ਇੱਕ ਵੰਤ ਦੇ ਦਿਖਾਓ ਕਿੱਥੇ ਜਿਹੜੇ ਸਾਧਨ ਦੇ ਚੇਲੇ ਵੀ ਹੋਏ ਨੇ ਉਹਨਾਂ ਦੀ ਦੋ ਦੀ ਕਬੂਤਰੀ ਹੋਈ ਹੈ ਇਸ ਕਰਕੇ ਸਾਧਨ ਦੀ ਕਹਿ ਸਕਦੇ ਅਸੀਂ ਸੰਤ ਸੂ ਅਨੇਕ ਕੇ ਠੀਕ ਹੈ ਜੋ ਪਵੇ ਸੋ ਛੁੱਟੈ ਵੱਧਾ ਗੁਣ ਗਾਵੈ ਅਬਨਾਸੀ ਹੈ ਜੋਨੀ ਗਰਮ ਨਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁੱਝ ਸਮੱਧਾ ਹੈ ਜੇਲਾ ਗੁੰਡਦਾ ਉਹ ਬਨਾਸੀ ਦੇ ਉਹ ਆਪ ਹੀ ਬਨਾਸੀ ਹੋ ਜਾਂਦਾ ਫਿਰ ਕੀ ਹੁੰਦਾ ਜੋਤ ਗਰਬ ਨਾ ਦਦਾ ਗਰਬ ਪੈਂਦਾ ਦਦਾ ਅੰ ਫਿਰ ਉਹ ਗਰਬ aven ਛੜਦਾ ਗੁਰ ਭੇਟਿਆ ਪਾਲ ਪ੍ਰਭ ਹਰ ਪੜ ਬੁਝ ਸਭ ਦਾ ਗੁਰ ਭੇਟਿਆ ਪਾਲ ਪ੍ਰਭ ਹਰ ਜਦ ਪਾਲ ਪ੍ਰਭ ਗੁਰ ਹਰ ਹਲ ਭੇਟ ਲਿਆ ਪੜ ਬੁਝ ਫੜ ਕੇ ਬੁਝੇ ਹੈ ਤੇ ਸੰਤ ਫਿਰ ਉਹਦੇ ਵਿੱਚ ਉਹਦੇ ਵਰਗਾ ਹੀ ਹੋ ਗਿਆ। ਸੁਭਾਗਿਆ ਵਿੱਚ ਹੀ ਜਦੋਂ ਪਾਰਬ੍ਰह्म ਰੂਪੀ ਹਰਨ ਨੂੰ ਪੜ ਕੇ ਬੁੱਝਿਆ ਤਾਂ ਉਹਦੇ ਵਿੱਚ ਸਮਾ ਗਿਆ ਹੈ। ਉਹ ਜਾਈ ਨਾਲ ਹੀ ਰਲ ਕੇ ਸ਼ਬਦ ਇੱਕੋ ਹੋ ਗਈ। ਸ਼ਬਦੇ ਬਣ ਗਿਆ, ਸ਼ਬਦ ਰੂਪੇ ਹੋ ਗਿਆ। ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ। ਅਤਮ ਆਗਤ ਸੋਏ ਜੋ ਜੋ ਕਹਿ ਸੁ ਮੁਕਤਾ ਹੋਏ ਉਹ ਸੁਨਵੀ ਤਾਨਾ ਦੇ ਪ੍ਰਵਤ ਸਾਚਰ ਦੀ ਅਚਰਜ ਕਥਾ ਹਰ ਪਾਇਆ ਹਰੇ ਪਾਉਣਾ ਸੀ ਆ ਹਰਾ ਹੋ ਗਿਆ ਇਹ ਤਾਂ ਬਣ ਕੇ ਦਾਦੀ ਲੱਕੜੀ ਜਲਦੀ ਕਰੇ ਪੁਕਾਰ ਬਸ ਪਗੰਦਾਰ ਤੇ ਦੂਜੀ ਵਾਰ ਠੀਕ ਹੈ ਜੀ ਜਮੂਲ ਤਾਂ ਟੁੱਟ ਗਈ ਤਾਂ ਫਿਰ ਦਾਦੀ ਲੱਕੜੀ ਬਣ ਗਈ ਹੈ ਦਾਦੀ ਲੱਕੜੀ ਹੋਈ ਆ ਫਿਰ ਵਿਚਾਰੀ ਹੋ